नए क्वेश्चन जन्म में नए क्वेश्चन रहे अपने चलते आप ही करे आप अपन चल तो आप ही करे नए क्वेश्चन आया के जाती गल सी सो कहना जो अपने कार्य में आप समाया चाहता वो चीज समाया की देखेसों ਕੰਨਾ ਨਾ ਇਕੱਠੇ ਜਨਮ ਨਾ ਕਿਸ ਮਰੇ ਸਦਾ ਜਮਦਾ ਪਾਤਸ਼ਾਹੀ ਕੋ ਸੇ ਤੁਸੀਂ ਸਾਨੂੰ ਰੋਗ ਦਾ ਬੋਲੂ ਕਿਹੜੀ ਗੱਲ ਦੀ ਭੈ ਦਿੰਨੇ ਹਾਲ ਤੇ ਆਪਣਾ ਬੰਦਾ ਤਾਂ ਸਹੀ ਪਾਪ ਲਗਨੋਂ ਜਮਾ ਬੰਦਾ ਪਰਮ ਹੋਊ ਗੱਲੇ ਖੂਗਾ ਪਰਮਖਾਨ ਨੂੰ ਜਮਾ ਬੰਦਾ ਸਿੱਖਾ ਨੂੰ ਗੁਰਸਖਾ ਦਾ ਜਮਾ ਬੰਦਾ ਪਰਮ ਗੜਤਾ ਜਮਾ ਬੰਦਾ ਜਨਮ ਹੰਦ ਦਾ ਪਰਮ ਗਿਆਨ ਜਾਗੀ ਕੋਸ ਇਸ ਕਿਹਾ ਤਾਂ ਜਾਗ ਲਗਿਆ ਉਹਦੇ ਸਿਖਿਆ ਨਾਲ ਸੁੱਤੀ ਕੋਈ ਜਾਗੀ ਆਤਮਾ ਜਿਵੇਂ ਪਰਦਾ ਪਰਫੈਸੀ ਉਹ ਹਦੈ ਵੀ ਕਿਹਾ ਆਤਮਾ ਹੋ ਰੇ ਮਰਦਿਓ ਜੀ ਫਿਰ ਮਰਦਾ ਕੀਆ ਮਰਦਾ ਰੂਪ ਹੈ ਰੂਪ ਕੀ ਹੁੰਦਾ ਕੁਝ ਨਹੀਂ ਰੂਪ ਤਾਂ ਘੋੜਾ ਆ ਦੂਰ ਹੋ ਰੂਪ ਕਿ ਮਿੱਟੀ ਦੀ ਵਰਦੀ ਪਾਣੀ ਦੀ ਵਰਦਾ ਅੱਗੇ ਦੀ ਮਰਦੇ ਹਵਾ ਦੀ ਮਰਦੇ ਆ ਜੀਵਾ ਦਾ ਮਾਇਆ ਦਾ ਮਰਦੇ ਨਾ ਵਾਇਆ ਮਰੇ ਨਾ ਰਾਮ ਮਰੇ ਮਰਦਾ ਕੀ ਹੈ ਮੋਸੋ ਹਰ ਦਾ ਕੋਸੋ ਨੇ ਉਹ ਰੱਖ ਲਿਆ ਨਾ ਉਹ ਰੱਖ ਲਿਆ ਸੁਮਨ ਲੈ ਮਨਾਉਂਦਾ ਸਾਡੀ ਮਾਚਿਆ ਨਹੀਂ ਹੁੰਦਾ ਕੋਈ ਆਕੇ ਜਨਮ ਆਨਾ ਕਿਸ ਮੋਰ ਇਹ ਪਿਓ ਗੁਰੂ ਆਪਨ ਚਲਦਾ ਆਪੇ ਹੀ ਕਰੇ ਚਲਦਾ ਆਪਨ ਜੋੜ ਦਿੰਦਾ ਸਰੀਰ ਨਾਲ ਸਰੀਰ ਬੜਿਆ ਦਿੰਦਾ ਤੋੜ ਦਿੰਦਾ ਉਹ ਫਿਰ ਉਹ ਮਿੱਟੀ ਮੁੱਟੀ ਅਡ ਅਡ ਉਹ ਗ੍ਰਾਮੇ ਪਬਨ ਸਮਾਇਆ ਕਿਉਂਕਿ ਮੈਂ ਜੋੜ ਤੋੜ ਜਾਇਆ ਮਾਟੀ ਮਾਟੀ ਹੋਈਏ ਫਿਰ ਹੋ ਜਾ ਇਹ ਚਲਦਾ ਤਾ ਇਹ ਫੜਾ ਉਹਦਾ ਹੁੰਦਾ ਹੈ ਬਿੱਟੀ ਦੀ ਮੂਰਤੀ ਹੈ ਚੱਲਦੀ ਫਿਰਦੀਆਂ ਗੱਲਾਂ ਕਰਦੀ ਹੈ ਚਾਹੋ ਵਿੱਚੋਂ ਕੱਢ ਲਿਆ ਜੋ ਕੁਝ ਨਹੀਂ ਫਿਰ ਉਹੀ ਚੱਲਦਾ ਹੈ ਜੀ ਤੋਂ ਵੀ ਚੀਜ਼ ਬਣਾ ਦੇਣੀ ਬਹੁਤ ਜੱਦ ਇਹ ਆ ਜਾਂਦਾ ਤੁਮ ਜੇ ਕਰਦੇ ਕੋਸ ਆਪ ਹੀ ਕਰਾ ਆਪਨ ਜਾਵਾਂ ਦ੍ਰਿਸ਼ ਅੰਦਰਿਸ਼ਟ ਆਗਿਆਕਾਰੀ ਧਾਰੀ ਸਭ ਆਪਣਾ ਆਪਣਾ ਦ੍ਰਿਸ਼ਟੀਾਂ ਵਿੱਚ ਆਪਣਾ ਜਾਣੇ ਦਾ ਫਰਕ ਲੱਗਦਾ ਜੇ ਦ੍ਰਿਸ਼ਟਾਂ ਵਿੱਚ ਸੇ ਹੁੰਦਾ ਹੈ ਆਪਣਾ ਜੀ ਨਾ ਅਰੇ ਜਾਣਾ ਰਹ ਹੁੰਦਾ ਚਾ ਤੀਂਦਾ ਨਹੀਂ ਸਾਥੋਂ ਸਦੀਰ ਚੌਦ ਕਾ ਆ ਜੀਵ ਅਧਿਕਾ ਨਾ ਚਲਾ ਗਿਆ ਗਿਆ ਕੋਈ ਕਿਤੇ ਚਾ ਕੋਲੇ ਖੜਾ ਉਹ ਸਾਡੇ ਸਾਹਮਣੇ ਕਿਹਦਾ ਮਹਿਸੂਸ ਨਹੀਂ ਹੁੰਦਾ ਤਰੇ ਸਾਹ ਹੁੰਦਾ ਮੋਂ ਸਾਦ ਪਤਾ ਹੁੰਦਾ ਸ਼ਰੀਰ ਜਾਏਗਾ ਈ ਤਾਂ ਅਸਿੱਖ ਚ ਵੀ ਨਹੀਂ ਆਇਆ ਪਰ ਅਸੀਂ ਮੰਨਦੇ ਹਾਂ ਅਮਿਚਰੋ ਜਿਵੇਂ ਸ੍ਰੀਤ ਨਹੀਂ ਰਹਿਦਾ ਸਿਰ ਦੀ ਹੱਥ ਤੋਂ ਸੰਪਦਾ ਲਿਖਦਾ ਹੁਣ ਹੈ ਫਿਰ ਅਸੀਂ ਆਪ ਦਿਸ ਮੰਨਦੇ ਨੇ ਉਹਦੇ ਇਸ ਅੰਗਰੇਜ਼ ਆਗਿਆਕਾਰੀ ਦਾ ਸਭ ਤੋਂ ਐਸਾ ਦੀ ਸ੍ਰਿਸ਼ਟੀ ਹੁਕਮ ਦੇ ਵਿੱਚ ਹੈ ਹੁਕਮ ਨੇ ਨਹੀਂ ਨਾ ਲੈ ਆਗਿਆ ਨਾਲ ਹੈ ਜਮਣ ਵਾ ਸ੍ਰੀ ਨਾਲ ਜੁੜ ਗਿਆ ਸੀ ਤਾਂ ਛੁੱਟ ਗਿਆ ਮਾਇਆ ਤੋਂ ਅਡੋ ਹੋ ਗਿਆ ਮਾਇਆ ਨਾਲ ਜੁੜ ਗਿਆ ये हुक्म नहीं खेल रहा था आज्ञकारी आज्ञा रहा है सारी सृष्टि ਦੇ ਵਿੱਚ ਕੋਈ ਜਰ ਜ਼ਿਲਕ ਜਿਉਂ ਚਹੀ ਚਾਤ ਕਲਾਂਗੰਦੀ हां कब छेड़ो छेड़ो छेड़ो आप पे आप सकल में आप अनेक जुगत रच थाव रची थाव उत आप पे आप सकल आप ਆਦਾਂ ਨਹੀਂ ਚਾਪੇ ਹੋ ਕੋਈ ਵੀ ਆਪਣਾ ਸਾਰਿਆਂ ਤੇ ਸਗਲ ਮੈਂ ਆਪ ਹੁਕਮ ਧਾਰਿਆਂ ਨੇ ਵਿੱਜੇ ਚਲੋ ਆਪਾਂ ਹੁਕਮ ਲੈ ਆਪੇ ਆਪ ਸਗਲ ਮੈਂ ਆਪ ਜਨਕ ਜੁਗਤੀ ਰਜੀ ਹੁਕਮ ਸਾਰਿਆਂ ਦੇ ਵਰਸਦਾ ਹੁਕਮ ਅੰਦਰ ਸਭ ਕੋ ਹੈ ਜੁਗਤੀ ਮੈਂ ਆਪ अपने जो अनेक चलते हैं ऋषि साहब और साहब उत्तर प्रदेश साहब होता है और जो अन्य प्रकार की जोड़ियां है जो ना रही वो जीव क्याजा को क्या जाए देखिए कीड़े में का रखकर ਹੋਗਪਸਵਾਦਾਂ ਚ ਜੀਬੀ ਜ਼ਰਾਂ ਦੇ ਹੋਗਪਸਵਾਦ ਹੈ ਐ ਨਾਹੀਂ ਕੋਸਖੰਡ ਧਾਰਨ ਧਾਰ ਰਿਹਾ ਬ੍ਰਹਮੰਡ ਬ੍ਰਹਮੰਡ ਅਵਨਾਸ਼ੀ ਕੰਪਲੀਟ ਹੋ ਗਿਆ ਵੀ ਜੀਬੀ ਹੈ ਹੁਕਮ ਵੀ ਹੋ ਗਿਆ ਤੇ ਹੁਕਮ ਕੀਤੇ ਬਾਅਦ ਜੀ ਬਾਅਦ ਦਾ ਜੀ ਬਾਸ ਤਾਂ ਇਹ ਅਵਨਾਸ਼ੀ ਨਾਹੀਂ ਕੋਸਖੰਡ ਧਾਰਨ ਧਾਰ ਰਿਹਾ ਬ੍ਰਹਮੰਡ ਅਵਨਾਸ਼ੀ ਨਾਹੀਂ ਕੋਸਖੰਡ ਇਹ ਅਵਨਾਸ਼ੀ ਹੈ ਕੋਈ ਇਹਦਾ ਟੁਕੜਾ ਨਹੀਂ ਹੈਗਾ ਤੁਕੜਾ ਨੀ ਹੈ ਕੋਈ ਨਾਲ ਜਾ ਪਾ ਆ ਆਪਣਾ ਸੀਗਾ ਟੁਕੜਾ ਵਜੇ ਸਕਦਾ ਜਾਂ ਕਟੇ ਨਹੀਂ ਜਾ ਸਕਦਾ ਉਹ ਟੁਕੜਾ ਹੀ ਨਹੀਂ ਹੋ ਸਕਦਾ ਨਾ ਇਹ ਕੱਟ ਘੱਟ ਉਹ ਬ੍ਰਹਮ ਬ੍ਰਹਮ ਅੰਡ ਦੇ ਵਿੱਚ ਬ੍ਰਹਮ ਅੰਡ ਦਾ ਕੀਤਾ ਹੋਇਆ ਬ੍ਰਹਮ ਨੇ ਅੰਡ ਰੂਪ ਦਾ ਕੀਤਾ ਹੋਇਆ ਉਹੜਾ ਪਰਮਾ ਬਾਹਰ ਤੁਹਾਡਾ ਯਾਰ ਪਰਮਦੇਵ ਜੀ ਦਾ ਉਹ ਨਹੀਂ ਸਾਨੂੰ ਅਸੀਂ ਦਾਲ ਕਹਿੰਦੇ ਨਾ ਕੁੜਾ ਲੱਗਦਾ ਹੈ ਨਿਆ ਉਹ ਜਿਹੜਾ ਜਿੱਥੇ ਨੇਰਾ ਹੈ ਕਰਨਾ ਹੈ ਨਹੀਂ ਉਹ ਜਿਹੜਾ ਹਿੱਸਾ ਨੇਰਾ ਹੈ ਉਹ ਮਸੀਂ ਦਾਲ ਕਹਿੰਦੇ ਨਿਆ ਦਾਲ ਨਹੀਂ ਹੈਗਾ ਨਾਲੇ ਉਹ ਹੋਰ ਉਹ ਇੱਕ ਸਾਜਣਾ ਉਹ ਸਾਜਣਾ ਜਿਸਦੇ ਵਿੱਚ ਪਰਮਾ ਉਹੀ ਉਹਦਾ ਇਮਾਨ ਹੈ परमात्मा ऐसे बना बारमুখী बार बाहर ले पास एवले होए बाहर ले पास ही नहीं रहा परण भयो नहीं होए परण माया नहीं होए बारे परबूए बाहर ले पास ही ਪੁਰਖ ਵਰਤੋ ਪੁਰਖ ਫਸਾ ਇਹ ਅਲੱਖ ਅੱਖਾਂ ਨੂੰ ਦੇਖੀਦਾ ਆਪੇਵ ਹੈ ਕੋਈ ਇਸ ਭੇਤ ਭਾਵ ਨਹੀਂ ਕਰ ਸਕਦੇ ਉਹ ਜੀਤ ਨਹੀਂ ਬਣ ਸਕਦੇ ਇਹਨੂੰ ਕੋਈ 잡 ਨਹੀਂ ਮਾਤਰ ਜਿਵੇਂ ਬਣ ਮਣਾਤੇ ਚਾਰ ਭੇਤ ਭਾਵ ਨਹੀਂ ਕਰ ਸਕਦੇ ਆਪੇਵ ਪੁਰਖ ਪ੍ਰਤਾਪ ਪੁਰਖ ਹੈ ਪਰਦਾਫ ਰੂਪਈ ਹੈ ਪਰਦਾਫ ਤੇਜ ਹੀ ਉਹ ਜੰਚ ਤੇ ਜਬ ਇਹ ਹੈ ਜੋ ਤਾਂ ਤੇਜ ਹੈ ਉਹੀ ਵਰਕਾ ਉਹੀ ਪਰਦਾਵ ਨੂੰ ਵਰਤਦਾ ਹੈ ਜਿਵੇਂ ਪਰਦਾਫ ਹੁੰਦਾ ਉਹੀ ਚੀਜ਼ ਹੈ ਵਸਦੀ ਆਜਿਆ ਦਾ ਪ੍ਰਦਾਪ ਨਿਕਲਦਾ ਉਹਦਾ ਪ੍ਰਦਾਪ ਨਹੀਂ ਚੱਲਦਾ ਅਸਰ ਤੇ ਉਹਦੀ ਜੋਤ ਹੈ ਚੱਲਦੀ ਹਾਂ